श्लोक मोहल्ला पहला मरण न मूरत पुछ्या पुछी चित्त न वार इकनी लदियां इक लद चले इकनी बद्धे पार आजा मूड ਕਰ ਉਹਨੇ ਹੋਰ ਕਰਦੇ ਕਹਿੰਦਾ ਮੌਲਨਾ ਦਾ ਮੂਰਤ ਵੀ ਕੋਈ ਪੁੱਛਦਾ ਕਿ ਮੈਂ ਕਦ ਮਰੂੰਗਾ ਨਾ ਕੋਈ ਦੱਸ ਸਕਦਾ ਕਿ ਮੌਲਨਾ ਸਾਹਿਬ ਹੀ ਦੱਸ ਸਕਦਾ ਦੁਆ ਕੀ ਦੱਸ ਦੂਗਾ ਨਾ ਕੋਈ ਦਿੱਤਵਾਰ ਦੱਸ ਸਕਦਾ ਨਾ ਕੋਈ ਪੁੱਛਦਾ ਇਕ ਕੜੀ ਲੱਦਿਆਂ ਇਕ ਤਾਂ ਚਲੇ ਗਿਆ ਤਾਂ ਆਪਣੀ ਟੰਗੋੜੀ ਲੈ ਕੇ ਜਿਹੜਾ ਕੋਈ ਬੀਸੀਐਫ ਜਹਾਜ ਆ ਇਕ ਲੱਦ ਚੱਲੇ ਇਕ ਤੇ ਇਕ ਨੰਬਰ ਸਿਰ ਤੇ ਪਾਰ ਵਧੀ ਜਾਂਦੇ ਨੇ ਹੋਰ ਪਾਰ ਚੱਕੀ ਜਾਂਦੇ ਨੇ ਵਧੀ ਜਾਂਦੇ ਨੇ ਪਟ ਭਾਰੀ ਕਰੀ ਜਾਂਦੇ ਨੇ ਤਾਪਾਂ ਦੀ ਹਾਂਜੀ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸ਼ਕਰ ਸਣੇ ਦਮਾਮੇ ਆ ਛੂਟੇ ਦਵਾਰ ਤੇ ਕਹਣਾ ਹੋਈ ਸ਼ਕਤੀ ਇੱਕ ਸ਼ਕਤ ਬਣ ਜੇ ਸਾਕੇ ਦੇ ਵਿਰੋਧੀ ਹੋ ਗਏ ਵਿਰੋਧ ਖੜੇ ਵੀ ਹੁੰਦੇ ਨੇ ਪਰ ਲਸ਼ਕਰ ਰੋੜੇ ਤਾਂ ਰਾਜੇ ਸੀ بڑے بڑے ਲਸ਼ਕਰਾਂ ਦੇ ਮਾਲਕ ਸੀ ਦਮਾਮੇ ਗਜ਼ਾਰੇ ਵੱਡੇ ਸੀ ਹਾਥੀਆਂ ਦੇ ਇਹਨੇ ਰੱਖਿਆ ਹਾਂ ਕਹਿੰਦੇ ਨੇ ਛੋਟੇ ਵਕਦੂਾਰ ਜਿਹੜੇ 516 ਮਹਿਲ ਦੁਆਸੀ ਜੋ ਛੁੱਟ ਉੱਥੇ ਹੀ ਰਹਿ ਗਏ ਤਮਾਮੇ ਵੀ ਉੱਥੇ ਹੀ ਰਹਿ ਗਏ ਸਭ ਉੱਥੇ ਹੀ ਰਹਿ ਗਿਆ بس ਖਾਲੀਆਂ ਤੇ ਚੱਲਦੇ ਨਾਨਕ ਢੇਰੀ ਛਾਰ ਫਿਰ ਹੋਈ ਛਾਰ ਅਨਾਨਕ ਜਿਹੜੀ ਸਵਾਦੀ ਵੀ ਨਾ ਬੜੀ ਜਿਹਨੂੰ ਕਹਿੰਦਾ ਸੀਗਾ ਬੰਦੇ 28 ਪੋਟਲੀ ਪਹਿਲਾਂ ਹੀ ਉਹ ਤਾਂ ਪੋਟਲੀ ਪੁੱਤੀ ਬੈਠਾ ਹੈ ਉਹ ਜਿਹੜਾ ਨੇ ਬੈਸਾਈ ਹਾਂ ਲਿਸੀ ਉਹ ਜਦੋਂ ਉਹਨਾਂ ਨੇ ਪਹਿਲਾਂ ਉਹਨਾਂ ਦੀ ਹੀਰਾਂ ਦੇ ਪਿੱਛੋਂ ਹੋ ਗਈ ਹੋ ਤਾਂ ਉਹੀ ਗਈ ਤੇ ਪਹਿਲਾਂ ਹੀ ਮਟਕੇ ਚੱਲਦਾ ਚੱਕੀ ਹੋਈ ਹੈ ਕੋਟਲੀ ਮੈਂ ਲਾਂਟਾਂ ਕੋਟ ਫਿਰ ਉਹਨਾਂ ਦੀ ਪਿੱਛੋਂ ਹੋ ਗਈ ਚਾਰ ਉਹਨਾਂ ਨੇ ਪੁੱਛ ਬਣਾ ਪੈ ਗਿਆ ਠੇਰੀ ਐ ਸਾ ਇਹ ਦੇਹੀ ਸਾਰੇ ਕੰਮ ਕਰਾਉਂਦੀ ਐ ਇਹ ਦਮਾਂ ਲਸ਼ਕਰ ਪਹੁੰਚਣ ਜੋੜੀਆਂ ਉਹ ਇਹ ਸਭ ਆ ਜਿਹੜੀ ਠੇਰੀ ਐ ਨਾ ਮਿੱਟੀ ਦੀ ਸਰੀਰ ਇਹਦੇ ਵਾਸਤੇ ਹੀ ਆ ਸਾਰੇ ਕਾਰਨੋਂ ਵੀ ਕੀਤੇ ਤਾਂ ਇਹ ਢੇਰੀ ਵੀ ਢੇਰੀ ਹੋ ਗਈ ਹਾਂਜੀ ਮਹੱਲਾ ਪਹਿਲਾ ਨਾਨਕ ਢੇਰੀ ਠਹਿ ਪਈ ریل ਦੀ ਇਹਦਾ ਤਹਿ ਜਾਣੀ ਦੀ ਤਹਿ ਵੀ ਅਸੀਂ ਤਹਿ ਜਾਣਾ ਸੀ ਤਾਂ ਭਾਈ ਮਿੱਟੀ ਦਾ ਕੋੜ ਮਿੱਟੀ ਦਾ ਇੱਕ ਰਾਸੀ ਇਹ ਹੋਰ ਕਿਸੇ ਮਿੱਟੀ ਦਾ ਕਿਲਾ ਮਿੱਟੀਓ ਬਣਾਇਆ ਨਾ ਇੱਕਦਮ ਦੇਖਿਆ ਨੇ ਫਿਰ ਢੇਰੀ ਹੋਰ ਕੀ ਹੈ ਮਿੱਟੀ ਦਾ ਕੋੜ ਤਾਂ ਮਿੱਟੀਓ ਹੋ ਜਾਵੇ ਇਹ ਮਿੱਟੀ ਦਾ ਕੋੜ ਹੈ ਸ਼ਰੀਰ ਪੀਟਰ ਚੋਰ ਬਹਾ ਲਿਆ ਵਿੱਚ ਕੀ ਬੈਠਾ ਚੋਰ ਬਹਾ ਖੋਟ ਵੇਚਿਆ ਖੋਟ ਹੁਣ ਖੋਟ ਹੈ ਤੇਰੇ ਜੀ ਦੇ ਵਿੱਚ ਖੋਟੇ ਖੱਟੀ ਆ ਫਿਰ ਤੈਨੂੰ ਖੋਟਾਇਆ ਜੈਨੋ ਖੋਟ ਇਹ ਜਿਹੜਾ ਖੋਟ ਇਹਦੇ ਖੋਟ ਛੱਡ ਦੇ ਖੋਟ ਰੱਖ ਕੇ ਲਾਭ ਨਹੀਂ ਐ ਖਰੇ ਜੇ ਖਜ਼ਾਨੇ ਚ ਪਾਣਾ ਤਾਂ ਖਰਾ ਹੋ ਜਾ ਖੋਟ ਨੂੰ ਕੱਢ ਦੇ ਵਿੱਚ ਜੀ ਆ ਜਿਨਾ ਚ ਜੀ ਐ ਉਹਨਾਂ ਚ ਖੋਟ ਐ ਖੋਟਨਾਂ ਕੜੀ ਫਿਰ ਤੋਂ ਰਹੀ ਰਹੀ ਨੀ ਤੂੰ ਤੂੰ ਕਰਤਾ ਤੂੰ ਕਿਹਾ ਫਿਰ ਆ ਤੂੰ ਆਪਣੇ ਰੋੜ ਚ ਮਿਲ ਗਿਆ ਖੋਟੇ ਤੈਨੂੰ ਵਖਰਾ ਕਰਦੀ ਹੈ ਜੀ ਦੇ ਵਿੱਚ ਖੋਟ ਸੀ ਜੀ ਇਹਨੂੰ ਖਰਾ ਹੋਣ ਦੇ ਲੋੜ ਸੀ ਪਰ ਇਹ ਖੋਟ ਦੀ ਖੋਟੇ ਲੈ ਕੇ ਚਲੇ ਗਿਆ ਹਾਂ ਕਈ ਜਿਆਦਾ ਖੋਟੇ ਹੋ ਗਏ ਚਲੇ ਜਾਂਦੇ ਨੇ ਥੈਂਕ ਯੂ ਸਤਿਗੁਰੂ ਖੋਟਿਓਂ ਖਰੇ ਕਰੇ ਜੇ ਸਤਿਗੁਰੂ ਨਾਲ ਜੁੜ ਜAVE ਤਾਂ ਖੋਟਿਓਂ ਖਰਾ ਹੋ ਜAVE ਹਾਂ ਖੜੇ ਹੋਰ ਦਿਓ ਲੋੜ ਹੈ ਜਨ ਹੋਰ ਛੋਟਾ ਤੋਂ ਪਹਿਲੇ ਕੀ ਗੱਲ ਸੀ ਫਿਰ ਖੜਾ ਹੋਣ ਤਾਂ ਆਈ ਸੀ ਹਾਂਜੀ ਪੌੜੀ ਜਿਨ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਦੁਖੀਏ ਸਦਾ ਕਾਲੇ ਮੂਹ ਮਾਇਆ ਜਿਹਨਾਂ ਅੰਦਰ ਦਿੰਦਾ ਦੁਸ਼ਟ ਹੈ ਉਹ ਵੱਡੇ ਸਾਰੇ ਹੀ ਇਨਾ ਦੇ ਅੰਦਰ ਜਿਹੜੇ ਗੁਰਬਾਨੀ ਦਾ ਵਿਰੋਧ ਕਰਦੇ ਤੇ ਬਹੁਤ ਜਾਣੇ ਸੀਰ ਹੁੰਦੇ ਨੇ ਨਾ ਉਹ ਦੇਖੋ ਉਦੋਂ ਲਿਖ ਰਹੇ ਨੇ ਇਸ਼ਾਰਾ ਦਾ ਵਿਰੋਧ ਕਰਨ ਲੱਗੇ ਹੋਏ ਨੇ ਜਿਹੜੀ ਚਤ ਦੇ ਵਿੱਚ ਸਾਰੇ ਵਿਰੋਧ ਕਰਨ ਮੂਰੇ ਗੁਰਬਾਨੀ ਰੱਖੀ ਹੈ ਅਰਥਾ ਦੇ ਅਨੰਤ ਕਰੀ ਜਾਂਦੇ ਵੱਡੇ ਨੱਕ ਵਡਾਇਆ ਧੱਕ ਵੱਡੇ ਨਾਂਖ ਨਹੀਂ ਆਉਂਦੇ ਮਹਾਕਰੂਪ ਰੂਪ ਉਹ ਪੜੀ ਹੋ ਸਕਦਾ ਬੁੱਧੀ ਹੋ ਸਕਦਾ ਸੋਹਣ ਬਾਰੇ ਉਹ ਪੜੀ ਹੋ ਸਕਦਾ ਬੁੱਧੀ ਕਰੂਪ ਹੋ ਵੀ ਉਹਦੀ ਪਹਿਲੀ ਗਰੂਪ ਕੁਜਾਤ ਕੁਲਖੜੀ ਜਿਹੜੀ ਕਹਿੰਦਾ ਮੇਰੀ ਪਹਿਲੀ ਬੁੱਧੀ ਸੀ ਤਵੀਰ ਕਹਿੰਦਾ ਗਰੂਪ ਜਿਹਦਾ ਰੂਪ ਠੀਕ ਨਹੀਂ ਸੀ ਕੁਜਾਤ ਦੀ ਜਾਤ ਵੀ ਠੀਕ ਨਹੀਂ ਸੀ ਮਖੜ ਵੀ ਠੀਕ ਨਹੀਂ ਸੀ ਸਾਰੇ ਤੇ ਬੁਰੀ ਉਹੀ ਗੱਲ ਕਹਿ ਰਹੇ ਨੇ ਮਹਾਕਰੂਪ ਤੁਖੀਏ ਸਦਾ ਉਹ ਦੁਖੀ ਹੋ ਰਹੇ ਨੇ ਸਦਾ ਪਾਇਆ ਨਾਲ ਕਾਲ ਖੈ ਉਹ ਮਾਰਦੇ ਨੇ ਕੋੜਾ ਹੂੰ ਮਾਰਦੇ ਨੇ ਨਾ ਐਵੇਂ ਤੂੰ ਮਾਇਆ ਗੱਲਾਂ ਮੈਂ ਤੈਨੂੰ ਮਾਰਨ ਨੂੰ ਉਹ ਵਾਹ ਇਹ ਗੱਲ ਸਾਡੇ ਦੀ ਬੋਲਦੇ ਪਾਣੀ ਨੂੰ ਵੀ ਬਗਾੜ ਕੇ ਫੇਸ ਕਰਦੇ ਸਾਡੇ ਸਾਥ ਰਮਾਇਆ ਵਾਸਤੇ ਪਾਇਆ ਨੂੰ ਮਾਰਦੇ ਜੁਰ ਨੂੰ ਮਾਰਦੇ ਹਾਂ ਨਹੀਂ ਭਲ ਨਿਤ ਪਰ ਦਰਬ ਹਿਰਨ ਹਰ ਨਾਮ ਚੁਰਾਇਆ ਹਰ ਜੀਉ ਸੰਗਤ ਮਤ ਕਰੋ ਰੱਖ ਲਿਓ ਹਰ ਰਾਇਆ ਜੋ ਕਰ ਰਹੇ ਨੇ ਉਹਨਾਂ ਨੂੰ ਕਹਿਣਾ ਹੈ ਇਛਾ ਹੈ ਪਰ ਹੋ ਦਰਬ ਹਿਰਨ ਰੋਜ਼ ਉੱਠਦੇ ਇਹੀ ਹੁੰਦੀ ਹੈ ਵੀ ਕਿਹਦੇ ਕੋਲ ਚਲੀਏ ਦੂਏ ਦੇ ਕਿਹੜੇ ਚੇਲੇ ਕੋਲ ਚਲੀਏ ਸਰਵ ਕੋ ਚਲੀਏ ਉਹ ਤੋਂ ਉਹ ਤੋਂ ਲਿਆਈਏ ਪ੍ਰੇਰ ਕੇ ਭਾਇਆ ਉਹ ਸੁਣਾਈਏ ਦਾਨ ਦੀਆਂ ਵੀ ਇੱਥੇ 10 ਗੁਣਾ ਉਹਦੇ ਘਾਹ 70 ਗੁਣਾ ਮਿਲਦਾ ਇਹ ਹੀ ਹਣਾ ਕੇ ਉਹ ਲਿਆਈਏ ਠੱਕੇ ਆ ਨਾਪ ਥੋੜਾ ਬਹੁਤਾ ਇਹ ਗਿਆਨ ਚੋਰੀ ਕੀਤਾ ਹੋਇਆ ਹੈ ਪਹਿਲਾਂ ਦੀਆਂ ਕਰਦੇ ਨੇ ਚੋਰੀ ਦਾ ਗਿਆਨ ਸੁਣਾ ਕੇ ਉਹ ਤਾਂ ਚੁਰਾਇਆ ਹੋਇਆ ਸਰਵਸਥ ਦੇ ਨੇ ਇਹਨਾਂ ਨੇ ਕਿ ਉਹਦੇ ਧਰ ਦੇ ਉੱਤੇ ਹਰ ਜੀ ਉਹਦੇ ਦੀ ਸਖਤ ਮਤਕ ਇਹ ਹਰ ਜੰਦ ਦੇ ਦੁੱਖ ਉਹ ਐਸਿਆਂ ਦੀ ਤਾਂ ਮਨਾ ਕਰੋ ਭਾਈ ਆਪਣੇ ਤੂੰ ਤਾਂ ਰੱਖ ਲੈ ਲੈ ਉਹ ਤੋਂ ਬਚਾ ਕੇ ਰੱਖ ਐਸੇ ਬੰਦਿਆਂ ਦੀ ਸ਼ਕਤ ਤੋਂ ਤਾਂ ਉਹ ਵੀ ਤੂੰ ਬਚਾ ਕੇ ਰੱਖ ਇਹਨਾਂ ਨੂੰ ਬਤ ਦੇ ਕਿ ਬਚਾ ਲਵੇ ਲੋਕ ਜਿਹੜੇ ਆਪ ਗੱਲੇ ਨੇ ਮਾਇਆ ਨਾਲ ਗਣੀ ਹੈ ਇਹ ਥੇਡੀਆਂ ਬੈਂਡੀਆਂ ਕਾਰਾਂ 'ਚ ਫਿਰਦੇ ਨੇ ਪੈਸੇ ਇਕੱਠੇ ਕਰਦੇ ਫਿਰਦੇ ਨੇ ਇਹਨਾਂ ਨੂੰ ਕੀ ਲੋੜ ਹੈ ਤਾਂ ਆਪ ਤਾਂ ਤੇ ਆ ਗਏ ਨਾ ਕਿਹ ਜੀ ਉਹ ਪ੍ਰਦੇਸ਼ ਦੇ ਕਰਦੇ ਨੇ ਮੇਰੇ ਜੀ ਉਹਨਾਂ ਤੇ ਨੀ ਕਿਸ ਜਾਗਰਤੀ ਪੈਦਾ ਕਰਦੇ ਸੀ ਠੀਕ ਹੈ ਇਹ ਤਾਂ ਸਾਰੀ ਗੱਲ ਆਪਣੇ ਅੱਜ ਕੱਲ੍ਹ ਦੇ ਪ੍ਰਚਾਰਕਾਂ ਦੇ ਲੱਗਦੀ ਹੈ ਜੀ ਉਦੋਂ ਇਹ ਤਾਂ ਹੁਣ ਦਾ ਸਮਾਂ ਜ਼ਿਆਦਾ ਆ ਹੋ ਗਏ 42 ਸਾਲ ਤੋਂ ਹੀ ਥੋੜਾ ਥੋੜਾ ਸ਼ੁਰੂ ਕੀਤੀ ਗੱਲ ਕਰ ਲਈ ਗੁਰਬਤ ਜਾਂ ਦੇਖਿਆ ਕੋਈ ਜਵਾਬ ਨਹੀਂ ਆ ਰਿਹਾ ਕਿ ਤੂੰ ਗਏ ਜਿਪਟੇ ਵਾਲਿਆਂ ਦੀ ਫੌਜ ਤਿਆਰ ਹੋ ਗਈ ਫਿਰ ਤਾਂ ਆਪਣੀਆਂ ਫਾਨਾਂ ਕੀ ਕਰਨ ਲੱਗੇ ਹੋ ਜਿਹੜਾ ਚੱਲੀਆਂ ਫਿਰ ਪੂਰੇ ਤੇ ਇਹ ਨਾਮ ਕੋਈ ਸਾਖੀ ਇਧਰੋਂ ਸੁਣ ਲਈ ਉਧਰੋਂ ਸੁਣ ਲਈ ਬਹੁਤ ਕੱਬੇ ਸੱਜੇ ਕਰਕੇ ਇਧਰ ਦੀਆਂ ਮਹਿਸਾਂ ਉਹ ਪਿੰਡ ਉਧਰ ਦੀਆਂ ਠੱਗੀ ਜਿਹਾ ਲਾਈ ਜਾਂਦੇ ਹੈ ਜੀ ਆਹ ਬਸ ਹਾਂ ਜੀ ਨਾਨਕ ਪਾਇਆ ਦੁਖ ਪਾਇਆ ਆ ਮਨਮੁਖ ਨੇ ਕਿਰਤ ਕਰਦੇ ਨੇ ਉਸ ਤੋਂ ਦੁੱਖ ਹੈ ਇਹ ਜਿਹੜੀ ਕਿਰਤ ਉਹਨਾਂ ਦੀ ਹੈ ਨਾ ਇਹਦੇ ਤੋਂ ਸੁੱਖ ਮਿਲਣ ਵਾਲਾ ਨਹੀਂ ਹੈ ਬਲ ਮੁਖਾਲੂ ਕਰਦੇ ਸੁੱਖ ਨਹੀਂ ਮਿਲਿਆ ਦੁੱਖੇ ਟਿਕੜੂ ਹੈਗਾ ਠੀਕ ਹੈ ਜੀ ਹਾਂ ਜੀ ਇੱਥੇ 17ਵੀਂ ਪੌੜੀ ਸਮਾਪਤੀ ਹੈ ਜੀ